ਸ਼ਲੋਕ ਮਹੱਲਾ 5ਵਾਂ ਛੱਟੜੇ ਬਾਜ਼ਾਰ ਸੋਹਣ ਵਿਚ ਵਪਾਰੀਏ ਵੱਖਰ ਹਿਕ ਆਧਾਰ ਨਾਨਕ ਖੱਟੇ ਸੋਤਣੀ ਬਾਜ਼ਾਰ ਜਿਹੜੇ ਨੇ ਛੱਟੇ ਹੋਏ ਨੇ ਛੱਟਲੇ ਬਾਜ਼ਾਰ ਸੋਣ ਵਿੱਚ ਵਪਾਰੀਏ ਵਪਾਰੀ ਵਿੱਚ ਸੋਨੇ ਨੇ ਬਾਜ਼ਾਰ ਸਾਰੇ ਛੱਟੇ ਹੋਏ ਤੇ ਖੱਤ ਪਈ ਹੋਈ ਐ ਸਿਰ ਦੇ ਉੱਤੇ ਹੱਥ ਐ ਕੱਕਰ ਇੱਕ અપਾਰ ਨਾਨਕ ਖੱਟੇ ਸੋਤਣੀ ਕੱਕਰ ਕੋਈ ਆਸਾਰੇ ਉਹ ਕੀ ਨਾਮ ਇਹ ਨਾਮ ਵਾਲਾ ਬਾਜ਼ਾਰ ਹੈ ਜਿਹੜਾ ਉਹਦੀ ਗੱਲ ਚਲਦੀ ਹੈ ਸਾਰੇ ਬਾਜ਼ਾਰ ਤੇ ਜੱਤੇ ਬਾਜ਼ਾਰ ਨੇ ਸਾਰੇ ਕੋਈ ਵਸੂਅ ਨੋਮ ਦੀ ਸਾਰੇ ਕੋਲ ਸਾਰੇ ਬਾਜ਼ਾਰ ਹੋਰ ਕੋਈ ਹੈ ਨਹੀਂ ਦੀ ਸੋਤਾ ਨਾਮ ਨਹੀਂ ਸੋਤਾ ਹੈ ਪੋਤਾਲੀ ਠੀਕ ਹੈ ਜੀ ਜਿਹੜੇ ਛਤੜੇ ਤੋਂ ਭਾਵ ਕੀ ਹੈ ਸਭ ਦੇ ਸਿਰ ਪਰ ਹੱਥ ਹੈ ਕਿਰਪਾ ਦਾ ਹਾਂ ਹਾਂ ਸਾਰਿਆਂ ਤੇ ਕਿਰਪਾ ਦਾ ਹੱਥ ਹੈ ਛੱਟੇ ਆਕਾਸ਼ ਨਾਲ ਤਤ ਨਾਲ ਪਰ ਇਹ ਆਪਣੇ ਅੰਦਰ ਹੈ ਬਾਹਰ ਹੈ ਜੀ ਅੰਦਰ ਵੀ ਹੈ ਬਾਹਰ ਵੀ ਹੈ ਅੱਛਾ ਪਰ ਆਪਾਂ ਅੱਜ ਗਗਨਦ ਅੰਦਰ ਉਹਦੀ ਗੱਲ ਕਰ ਰਹੇ ਹਾਂ ਜੀ ਹਾਂ ਗਗਨਦ ਉਹ ਬਾਬਾ ਜੀ ਇੱਥੇ ਬჯੂਗਾ ਗਗਨਦ ਜਾਂ ਖੜ ਚੁ ਰੁਗਾ ਨਾ ਖੱਟੂ ਧਲੀ ਫੇਰ ਕਹੇ ਬਾਬਾ ਬੱਜੂ ਹਾਂਜੀ ਕਬੀਰਾ ਹਮਰਾ ਕੋ ਮਾਏ ਸਮਾਇ ਕਬੀਰਾ ਕੰਨਾ ਲਾਇਆ ਕਬੀਰ ਨਹੀਂ ਲੱਗਦਾ ਤੇ ਕਬੀਰਾ ਲਾਇਆ ਬੁੱਧੀ ਕਹਿ ਰਹੀ ਹੈ ਜਿਹੜਾ ਸਰੀਰ ਵਿੱਚ ਆ ਕਬੀਰਾ ਛੋਟਾ ਹੈ ਅੰਦਰਲਾ ਕਬੀਰ ਹੈ ਗੁਟਾ ਹੋ ਕਬੀਰਾ ਹਮਰਾ ਕੋ ਨਹੀਂ ਆਪਣਾ ਭਾਈ ਅਤੇ ਕੋਈ ਨਹੀਂ ਹੈ ਹੁਣ ਕਿਸ ਨੂੰ ਕਹਿ ਨਹੀਂ ਅਜਿਹੀ ਕਿਸੇ ਦੇ ਸੰਸਾਰ ਵਿੱਚ ਨਾ ਕੋਈ ਸਾਡਾ ਹੈ ਨਾ ਕਿਸੇ ਦੇ ਜਿਹਨੇ ਰਚਨ ਲਾਇਆ ਜਿਹਨੇ ਆਪਣੀ ਜੋਤ ਪੈਦਾ ਕੀਤੀ ਹੈ ਨਾ ਪੈਦਾ ਕਰਕੇ ਆਇਆ ਮਾਇਆ ਚ ਰੱਖ ਦਿੱਤੀ ਹੈ ਉਹਦੇ ਵਿੱਚ ਸਵਾਉਣਾ ਵਾਪਸ ਪੈ ਕੁਮਾਰ ਜਾਓ ਕਿਰੂ ਧਾਰੂ ਨ ਜਾਓ ਵਾਪਸ ਜਾਓ ਇਦੇ ਵਿੱਚੋਂ ਜੋਤ ਆ ਰਹੀ ਹੈ ਉਹਦੇ ਅੰਦਰ ਹੀ ਸੁਭਾਂ ਚ ਵਾਪਸ ਹੋ ਜਾਓ ਆਪਣੇ ਮੂਲ ਚ ਸੁਭਾਜੋ ਜਾ ਕੇ ਤੁਸੀਂ ਮਾਇ ਸਮਾਏ ਕਹਤੇ ਉਪਜੀ ਤੈ ਮਲੀ ਜੇ ਤੋ ਕੋਈ ਚੀਜ਼ ਪੈਦਾ ਉਂਦੀ ਹੈ ਉੱਥੇ ਮਿਲਦੀ ਹੈ ਜਾ ਕੇ ਉਹ ਫਿਰ ਮਿਲਣਾ ਪੈਣਾ ਠੀਕ ਹੈ ਜੀ ਇਹ ਵਾਲਾ ਸ਼ਲੋਕ 214 ਨੰਬਰ ਦੁਬਾਰਾ ਕਬੀਰ ਜੀ ਦੇ ਸ਼ਲੋਕਾਂ ਚ ਵੀ ਆਉਂਦਾ ਜੀ ਹਾਂ ਜੀ ਹਾਂ ਜਨਸਾਰੀ ਰਸਤੇ ਤੋੜਤੇ ਜਿਨੇ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੀ ਜਿਹੜਾ ਸੰਦਾ ਪਿਤਾ ਮਾਤਾ ਜੀ ਨੇ ਸਾਨੂੰ ਪੈਦਾ ਕੀਤਾ ਆ ਮਾਇਆ ਨਾਲ ਜੋੜਿਆ ਉਹਦੇ ਵਿੱਚ ਸੋਹਣਾ ਪਿੱਛੇ ਆਪਾਂ ਨੇ ਆਪਣੇ ਮੂਲ ਚ ਸੋਹਣਾ ਉਹੀ ਆਪਣਾ ਪਿਤਾ ਉਹੀ ਮਾਤਾ ਹੈ ਠੀਕ ਹੈ ਪਰ ਇਹਨਾਂ ਦੋਹਾਂ ਸ਼ਲੋਕਾਂ ਦੇ ਵਿੱਚ ਕੋਈ ਅੰਤਰ ਨਹੀਂ ਮੈਨੂੰ ਲੱਗਦਾ ਬਿਲਕੁਲ ਇੱਕ ਜੇ ਲਿਖੇ ਲੱਗਦੇ ਇਹ 214ਵਾਂ ਸ਼ਲੋਕ ਵੀ ਇਹੀ ਹੈ ਕੋਈ ਵੀ ਫਿਰ ਦੋ ਵਾਰ ਆਇਆ ਸੰਦੇ ਵਿੱਚ ਉਹਤੇ ਸ਼ਲੋਕ ਦੀ ਵਿਆਖਿਆ ਐਂ ਕਰਦੀ ਕੋਈ ਗਲਤ ਵਿਆਖਿਆ ਕਰ ਦਵੇ ਇਹ ਇੱਥੇ ਸ਼ਲੋਕ ਰੱਖਿਆ ਵਿਆਖਿਆ ਕਰਨ ਵਾਸਤੇ पौड़ी, ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅਮ੍ਰਿਤਾ ਮਨ ਲੋਚੈ ਉਹਨ ਮਿਲਣ ਕੋ ਕਿਉ ਵੰਜੈ ਕਿਤਾ ਇਹ ਆਪਣ ਟਕੀ ਬਾੜੀ ਹੈ રે ਇਹ ਅਮਰਤ ਕਾ ਬਿਰਖ ਬਣਨਾ ਹੈ ਕਿਹੜਾ ਨਾਨਕ ਗੁਰਸਤੋਹ ਰੁਖ ਕਰਮ ਫਲ ਫਲ ਗਿਆਨ ਇਹ ਅਮਰ ਇਹ ਇਸ ਰੁਖ ਦੀ ਗੱਲ ਜਾੜੀਆਂ ਉਬਰਤ ਗਿਆਨ ਉਬਰਤ ਮਿਲਣਾ ਹੈ ਕਿਉਂ ਕੋ ਕੇ ਉਗਣਾ ਨਾ। ਨਾ ਕੋਰਸ ਤੋ ਰੁਕੋ ਸੰਤੋਗ ਸਤੋਗ ਸੇ ਬਾਝਾ ਉਗਣਾ। ਇਹ ਰੁਕਵਣਾ ਇਹਨੂੰ ਕੀ ਫਾਲ ਲੱਗਣਾ? ਗਿਆਨ ਫਾਲ ਲੱਗਾ। ਗਿਆਨ ਦਾ ਫਾਲ ਲੱਗਣਾ। ਉਬਰਤਾ ਅਗਲਤ ਕੇ ਅੰਨ ਮਿਲਣਾ ਹੈ ਤੋ ਬਨ ਲੋ ਹੁਣ ਮਿਲਣ ਕੋ। ਕਿਉ ਬੰਜੇ ਕਿੱਤਾ। ਜਿਹਨੂ ਗੱਲੂ ਲੋਟਦਾ ਫਤ ਜਾਵੇ ਕਿਵੀ। ਤੱਲੇ ਜਾਵੇ ਕੌਣ ਜੋ ਮੱਝੇ ਕਿਤਾ ਲਿਜਾਵੇ ਕੌਣ ਤੇ ਉੱਤੇ ਪਹੁੰਚੇ ਕਿਵੇਂ ਕਿਸ ਵਸਤੂ ਤੇ ਪਹੁੰਚੇ ਕਿਵੇਂ ਲਿਜਾਵੇ ਕੌਣ ਹਾਂਜੀ ਵਰਨਾ ਚਹਿਨਾ ਬਹਾਰਾ ਉਹ ਅਗੰਮ ਅਜਿੱਤਾ ਉਹ ਪਿਆਰਾ ਜੀਕਾ ਜੋ ਖੁੱਲ ਪਿੱਤਾ ਵਰਨਾ ਚਹਿਨਾ ਬਹਾਰਾ ਉਹ ਬਖਦਾ ਵਰਲਡ ਕਹਿ ਨਹੀਂ ਹੁੰਦਾ ਜਿਹੜੇ ਵਿਰਖ ਦੀ ਅਸੀਂ ਗੱਲ ਕਰਦੇ ਹਾਂ ਡੜਾਕਾਰੀ ਵਿਰਖ ਹੈ ਹਰਨਾ ਜੈਨਾ ਬਾਰਾ ਉਹ ਅਗੰ ਅਜਿੱਤਾ ਹੋ ਰੱਬ ਬੁੱਧੀ ਤੋਂ ਪਰੇ ਹੈ ਅਜਿੱਤਾ ਹੈ ਜਿਤਨੀ ਜਿਤਿਆ ਦੀ ਜਾ ਸਕਦਾ ਉਹਨਾਂ ਨੇ ਕਿਸੇ ਨੇ ਜਿੱਤੇ ਹੋਰ ਆਲਦੀ ਨੇ ਸਾਰੀਆਂ ਜਿਤਨੀ ਉਹ ਨਹੀਂ ਹਾਰਿਆ ਉਹਨੂੰ ਨਹੀਂ ਕੋਈ ਹਰਾ ਸਕਦਾ ਸੱਚ ਨੂੰ ਕੋਈ ਨਹੀਂ ਹਰਾ ਸਕਦਾ ਸੰਤੋਖ ਨੂੰ ਕੋਈ ਨਹੀਂ ਹਰਾ ਸਕਦਾ ਸਤ ਸੰਤੋਖ ਦਾ ਬਿਰਚਾ ਹੈ ਉਹ ਪਿਆਰਾ ਜੀ ਕਾ ਜੀ ਨੂੰ ਪਿਆਰਾ ਲੱਗਦਾ ਹੈ ਜੀ ਨੂੰ ਪਿਆਰਾ ਲੱਗਦਾ ਹੋਰ ਜੀ ਕਾ ਜੋ ਖੋਲ ਲੈ ਪਿੱਤਕੋ ਜੋ ਖੋਲ ਲੈ ਪਿੱਤਕ ਜਿਹੜਾ ਸਾਰੇ ਭੇਦ ਖੋਲ ਦਵੇ ਜਿਹੜੇ ਸਾਰੇ ਸਵਾਲ ਭੇਦ ਨੇ ਜਿਹੜੀਆਂ 부ਝਾਰਤਾਂ ਨੂੰ ਗੁਰਬਾਣੀ ਦੀਆਂ ਸਾਰੀਆਂ 부ਝਾਰਤਾਂ ਨੂੰ ਖੋਲ ਦਵੇ ਲੁੱਤ ਭੇਦ ਗੁਜਲਵੇ ਨਹੀਂ ਉਹ ਪਿਆਰਾ ਜੀ ਕਾ ਮੇਰੇ ਜੀ ਦਾ ਪਿਆਰਾ ਬਹੁਤ ਹੈ ਮੇਰੇ ਜੀ ਨੂੰ ਤਾਂ ਬਹੁਤ ਪਿਆਰਾ ਲੱਗਦਾ ਚਲੋ ਬਾਕੀ ਕਹਿ ਨਹੀਂ ਸਕਦੇ ਹਾਂਜੀ ਸੇਵਾ ਕਰੀ ਤੋ ਸਾੜੀਆਂ ਮੈਂ दस्यो ਮਿੱਤਾ ਕੁਰਬਾਨੀ ਵੰਜਾ ਵਾਰਣੈ ਬਲੇ ਬਲ ਕਿੱਤਾ ਸੇਵਾ ਕਰੀ ਤੋ ਸਾੜੀਆਂ ਮੇਰਾ ਮਨ ਕਰਦਾ ਤੇਰੀ ਸੇਵਾ ਕਰ ਲੂ ਕਿਹਦੀ ਸੇਵਾ ਕਰ ਲੂ ਮੇਰਾ ਮਨ ਕਰਦਾ ਤੇਰਾ ਸੇਵਾ ਕਰੀ ਤੋ ਸਾੜੀਆਂ ਮੈਂ ਦੱਸਿਓ ਮਿੱਤਾ ਬੀੜੋ ਦਾ ਮੇਰੇ ਵਿੱਤਲ ਵਿੱਚ ਦੱਸਿਆ ਵੀ ਐਸੇ ਕੋਨੇ ਬਿਰਵੇ ਗੱਲ ਦੱਸੀ ਸੀ ਕੁਰਬਾਨੀ ਵਾਲ ਦੇ ਪਨੇ ਬਲ ਦਿੱਤਾ ਕੁਰਬਾਨ ਹੋ ਜਾਉਂਦੇ ਉਹ ਤੋਂ ਆਪਣੇ ਆਪ ਨੂੰ ਕੁਰਬਾਨ ਕਰਦਾ ਬੱਚਾ ਆਪ ਆਪ ਕੁਰਬਾਨ ਕਰਦਾ ਤੇ ਬਲੇ ਬਲ ਕੀਤਾ ਉਹ ਉਹਦੀ ਉਹਦੀ ਸਿਫਤ ਸਲਾਹੀ ਕਰਦਾ ਚਲਾ ਜਾ ਉਹਦੀ ਸੁਣੋ ਲਾਇ ਚਿੱਤਾ ਇਸ ਲਿਖਿਆ ਨਾਨਕ ਦਾਸ ਇਸ ਨਉ ਅੰਮ੍ਰਿਤ ਸਤਗੁਰ ਦਿੱਤਾ ਦੱਸਦਾ ਹੁੰਦਾ ਪਿਆਰੇ ਸੰਤਾਂ ਨੂੰ ਦਰਸ਼ਨ ਸੰਤ ਪਿਆਰਿਆਂ ਉਹ ਪਿਆਰੇ ਸੰਤਾਂ ਨੂੰ ਦੱਸਦਾ ਹੁੰਦਾ ਸਾ ਤਾਫੇ ਦਸ ਹੁੰਦਾ ਜੀ ਲਾ ਕੇ ਸੁਣੋ ਪਹਿਲਾਂ ਸੁਣਿਆ ਹੀ ਨਹੀਂ ਪਹਿਲਾਂ ਹੀ ਬਣ ਕੇ ਜਟੀਆਂ ਸੰਤ ਬਣ ਕੇ ਸੁਣਾਉਣ ਲੱਗ ਸੁਣਤਾ ਲੈਦੇ ਪਹਿਲਾਂ ਸਭਿਤਾ ਲੈਦੇ ਪਹਿਲਾਂ ਪਹਿਨ ਹੀ ਡੌਣੂ ਜਿਵੇਂ ਬਿਜਾਉਣ ਲੱਗੇ ਤਸਾਂ ਸੰਤ ਪਿਆਰੇ ਸੁਣੋ ਲਾਇਕ ਤਾ ਆਗਾ ਰੀਓ ਸੁਣੀ ਨਹੀਂ ਸੰਤਾਂ ਦੇ ਚਤਲਾ ਕੇ ਜੇ ਸੁਣ ਲੈਦੇ ਤਾਂ ਮੂਰਖ ਬਣ ਕੇ ਚੁੱਪ ਕਰਕੇ ਨਾ ਬੈਠਦੇ ਹੁਣ ਬੋਲਦੇ ਕੁਝ ਜਿਸ ਲਿਖਿਆ ਨਾਨਕ ਦਾਸ ਉੱਤੇ ਸ ਲੋਖਮਰਤ ਦਿੱਤਾ ਜਿਸ ਲਿਖਿਆ ਜਿਹਨੇ ਆਪਣੇ ਅੰਦਰ ਲਿਖ ਲਿਆ ਬੁੱਦ ਲਿਆ ਆਪਣਤ ਲੈਣਾ ਨਾਨਕ ਦਾਸ ਇਸ ਨੋ ਉਪਰਤਾ ਸਤਗੁਰ ਦਿੱਤਾ ਉਹਨੂੰ ਸਤਗੁਰ ਨੇ ਉਪਰ ਦਿੱਤਾ ਜਿਹਨੇ ਉੱਤੇ ਲਿਖਿਆ ਵੀ ਅਮਰਤ ਪ੍ਰਾਪਤ ਕਰਨਾ ਉਹ ਉਪਰ ਦਾਸ ਬਣ ਗਿਆ ਸਤ ਤੋਂ ਉਹਨੂੰ ਉਪਰ ਗਿਆ ਜਿਹੜਾ ਰਹਿ ਗਿਆ ਉਹ ਰਹਿ ਗਿਆ ਉਦਾ ਉਤੇ ਉਹਨੂੰ ਅਮਰਤ ਮਿਲਣਾ ਉਹ ਸੰਤ ਕਾ ਨੂੰ ਉਹਦਾ ਬਨਾਰਸ ਕਾ ਠੱਗ ਆਪ ਰੋਚੇ ਟਿੱਕੇ ਕੱਪੜੇ ਮੇਰੇ ਜਟਖਰੌਰ ਜੀ ਉਹ ਤਨ ਮੁਖ ਲੋਗ ਦੂਜੇ ਦਾ ਪਸਟੌਰ ਜੀਓ ਤੇ ਬੋੜ ਨਭੂਜਣ ਆਪਣਾ ਸੇ ਪਸਪਸੇ ਚੋਰ ਜੀਵਤਾ ਪਸ਼ੂ ਦੇ ਲੰਗਰ ਨੇ ਗੁਰਬਾਨੀ ਸੁਣੀ ਦੀ ਕੀ ਕਹੀ ਹੈ ਤਾਂ ਸੁਣੀ ਹੈ ਨਾ ਬੰਦੀ ਹੈ ਮਿਲਣਾ ਕੀ ਸੀ ਸੋ ਕੇ ਤਾਂ ਮਿਲਣਾ ਕੀ ਸੀ ਹੋਗੀ ਹਾਂਜੀ ਜਿਸ ਲਿਖਿਆ ਨਾਨਕ ਦਾਸ ਤਿਸ ਅੰਮ੍ਰਿਤ ਸਤਗੁਰ ਦਿੱਤਾ ਹੈ ਅੰਮ੍ਰਿਤ ਹੈ ਜਿਹੜਾ ਇਹ ਸਤਗੁਰ ਤੋਂ ਹੀ ਪ੍ਰਾਪਤ ਹੁੰਦਾ ਹੈ ਤੋਂ ਹੀ ਪ੍ਰਾਪਤ ਸਤਗੁਰ ਨਹੀਂ ਦਿੰਦਾ ਅਰ ਦਾਹਰ ਬਣ ਕੇ ਨੇ ਆਇਆ ਜੀ ਤੇ ਲੈ ਆਇਆ ਠੀਕ ਹੈ ਤੇ ਜਦੋਂ ਕੋਈ ਸੰਸਥਾਵਾ ਕਹਿੰਦੀ ਹੈ ਪੰਜ ਪਿਆਰੇ ਨਾਮ ਦੇ ਸਕਦੇ ਆ ਇਹ ਫਿਰ ਇੱਥੇ ਤਾਂ ਗੱਲ ਉਤੇ ਨੇ ਔਰ ਮੇਰੇ ਹੁੰਦੇ ਦਿੰਦੇ ਫਰਕ ਕਿਆ ਕਰੇ ਪੰਜ ਬਾਣੀਆਂ ਪੜੇ ਉਹ ਕੋ ਤਸਲੇ ਇਹ ਚੀਜ਼ ਪ੍ਰਾਪਤ ਹੋ ਗਈ ਲੈ ਲੈ ਫਿਰ ਉਹਨੂੰ ਦੇ ਬਾਅਦ ਵਿਚਾਰ ਕਾਫੀ ਨੂੰ ਕਰਦੇ ਪਰ ਜਿਹੜੀ ਆ ਵਾਲੀ ਪੰਕਤੀ ਹੈ ਤੋਂ ਤਾਂ ਇਹ ਸਿੱਧ ਹੁੰਦਾ ਹੈ ਕਿ ਨਾਮ ਕੇਵਲ ਸਤਿਗੁਰ ਤੋਂ ਹੀ ਪ੍ਰਾਪਤ ਹੋ ਸਕਦਾ ਇਹ ਬੇ ਮਰੇ ਤਵੇਖ ਬੋਲਣ ਚ ਤਵੇਖ ਅਬ ਵੇਖਦਾ ਪਤਾ ਲੱਗਦਾ ਉਹਨਾਂ ਦੀ ਬੋਲੀ ਤੋਂ ਪਤਾ ਲੱਗਦਾ ਉਹ ਵੇ ਕੀ ਰਹੇ ਹੋ ਦੀ ਅਗਿਆਦੀ ਦੇ ਠੀਕ ਹੈ ਜੀ